ਸੇ ਲੋਕ ਮਹੱਲਾ ਤੀਜਾ ਗੁਰਮੁਖੀ ਧਿਆਨ ਸਹਿਜ ਧੁਨੀ ਉਪਜੈ ਸਚ ਨਾਮ ਚਿਤ ਲਾਇਆ ਗੁਰਮੁਖੀ ਅੰਦਿਨ ਰਹੇ ਰੰਗ ਰਾਤਾ ਹਰਕਾ ਨਾਮ ਮਨ ਪਾਇਆ ਗੁਰਮੁਖੀ ਕੀ ਅਲ ਕੀਆ ਗੁਰਮੁਖਾ ਧਿਆਨ ਅਸਲ ਜੇ ਮਨ ਜਿਹੜਾ ਹੈ ਧਿਆਨ ਅੱਛਾ ਜਦੋਂ ਟਿਕ ਜਾਂਦਾ ਨਾ ਧਿਆਨ ਬਣ ਜਾਂਦਾ ਹੈ ਗੁਰਮੁਖੀ ਧਿਆਨ ਕਿਹੜਾ ਹੈਗਾ ਸਹਿਜ ਇਕਜੱਟ ਚਾਂਟੇਂ ਗਿਆ ਬੋਲਤੇ ਗਏ ਦੋਨੋਂ ਉਪਰ ਗਏ ਕਿ ਸਹਿਜ ਹੋ ਜਾਂਦੇ ਬੋਲਿਆ ਫੇਰੇ ਜੋ ਤੁਮ ਤਾਂ ਦੋ ਉਹੀ ਧਿਆਨ ਨੂੰ ਜਾਣਿਆ ਤੁਦ ਧਿਆਨ ਆਂ ਕਿੱਥੇ ਟਿਕਾਇਆ ਸੀ ਤੁਦ ਵਿੱਚ ਧਿਆਨ ਟਿਕਾਇਆ ਸੀ ਵੀ ਤੁਹਾਨੂੰ ਸੁਣੂਗੀ ਤੁਦ ਵਿੱਚ ਧਿਆਨ ਟਿਕਾਇਆ ਸੀ ਆ ਤੁਹਾਨੂੰ ਸੁਣਗੀ ਠੀਕ ਹੈ ਜੀ ਤੁਦ ਜਾਣ ਲਿਆ ਤੁਰ ਮੈਂ ਧਿਆਨ ਤੇ ਧਿਆਨ ਮੈਂ ਜਾਣਾ ਗੁਰਮੁਖੀ ਅਕੱਠ ਘੋੜੀ ਇਹ ਅਕੱਠ ਤਰ੍ਹਾਂ ਦੀ ਗੁਰਮੁਖੀ ਦੀ ਸੱਚ ਨਾਮ ਚਿਤ ਲਾਇਆ रंग ਨਾਮ ਚਿਤ नाम मन पाया, ਜੁੜ ਗਏ आनंदन रहै रंगै रत्ता। आज फेर किया इसे रमी जे रंग्या रैंदा अंदर। किसे रंग जे रंग्या रैंदा। आनंदन रहै रंग रत्ता। हरका लोभ। क्योंकि हरका लोभ ऐसा मां पा जांदा है कि बच्चे ਇਹ ਬੁੱਧ ਬੱਚੇ ਨੂੰ ਹੈ ਨਾ ਆਂਗੂ ਮੁਖੂ ਲੋਉ ਲਗਦਾ ਠੀਕ ਹੈ ਗੁਰਮੁਖੀ ਹਰ ਬੋਲੈ ਗੁਰਮੁਖੀ ਹਰ ਸਹਿਜ ਕੀ ਹਰ ਦੇਖ ਵਿੱਚ ਕੀ ਗੁਰਮੁਖਾਲੀਆ ਗੁਰਮੁਖੀ ਆਰ ਬੋਲਣਾ ਗੁਰਮੁਖਾਲਾ ਬੋਲੇ ਹਰ ਕੀ ਕਥਾ ਕਰਦੇ बोलदे कि दे, देखदे कि गुरमुख दे दे उना दी दृष्टि वखरी है गुरमुखी देखना की है 깟ਡ 깟ਡ ਮੈਂ ਹਰ ਜੂ ਬਸ ਗੁਰਮੁਖੀ ਦੀ ਦ੍ਰਿਸ਼ਟੀ ਆ 깟ਡ 깟ਡ ਮੈਂ ਹਰ ਜੂ ਬਸ ਗੁਰਮੁਖੀ ਦ੍ਰਿਸ਼ਟੀ ਔਰ ਜੋ ਦੇਖਤੀ ਆ ਉਹੀ ਬੋਲੀ ਆ ਉਹਨਾਂ ਦੀ ਗੁਰਮੁਖੀ ਹਰ ਸਹਜ ਰੰਗ ਲਾਇਆ ਗੁਰਮੁਖੀ ਭਾਰੇ ਸਹਜ ਰੰਗ ਲਾਇਆ ਗੁਰੂ ਨੇ ਇਸ ਤਰੀਕੇ ਨਾਲ ਸਹਜ ਅਵਸਥਾ ਚ ਰਹਿ ਕੇ ਤਿਨ ਕੇ ਨਾਮ ਦਾ ਰੰਗ ਆਪਣੇ ਆਪ ਨੂੰ ਲਾ ਲਿਆ ਰੰਗ ਲਾ ਕੇ ਆਰਾਮ ਚੜ ਗਿਆ ਹੂੰ ਰੰਗ ਲਾ ਕੇ ਲਾਗਤ ਹੈ ਭਗਤ ਭਗਤ ਭਗਤ ਹੈ ਗੁਰਮੁਖ ਨੂੰ ਹਰ ਵਾਲਾ ਰੰਗ ਲੱਗ ਗਿਆ ਅਜੇ ਨਾਲ ਚੜਿਆ ਰਹੂਗਾ ਲੱਗਦਾ ਰਹੂਗਾ ਚੜਦਾ ਚੜਦਾ ਰਹੂਗਾ ਜੀ ਜਿੰਨਾ ਜੇ ਡੁੱਬਿਆ ਹੋਊ ਕਪੜਾ ਉਹਨਾਂ ਚ ਜਿਆਦਾ ਰੰਗ ਜਿਹੜੂ ਹੋਵੇ ਠੀਕ ਹੈ ਜੀ ਗੁਰਮੁਖੀ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅੰਧੇਰ ਚੁਕਾਇਆ ਇਸ ਤਰੀਕੇ ਗੁਰਮੁਖੀ ਗਿਆਨ ਪ੍ਰਾਪਤ ਲਗਾਤਾਰ ਜੁੜਦਾ ਅਗਿਆਨ ਅੰਧੇਰ ਉਹ ਜਿਹੜਾ ਅਗਿਆਨ ਦਾ ਅੰਧੇਰ ਤਿਮਰ ਉਹਨਾਂ ਕਾਇਰ ਉਹ ਕਾਇਰਤਾ ਵਾਲਾ ਜਿਹੜਾ ਅੰਧੇਰਨ ਪਰਬ ਹਾਂ ਜੇਵਰਾ ਤੇ ਰਹਦਾ ਪਰਬ ਜਿੱਤੇ ਪਰਮਾ ਦਾ ਕਾਇਰਤਾ ਅੱਛਾ ਜੀ ਕਾਇਰਤਾ ਵਾਲਾ ਹਨੇਰਾ ਜਿਹੜੀ ਪਰਬ ਉਧਰ ਬਿੜ ਜਾਂਦਾ ਗੁਰੂ ਸੇ ਗੁਰੂ ਕਾਇਆ ਨਹੀਂ ਰਹਿਣਾ ਸੂਰਮਾ ਹੁੰਦਾ ਫਿਰੇ ਚਾਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਹੀਏਥਾ ਸੂਰਾ ਠੀਕ ਹੈ ਜੀ ਤੁਰ ਪੂਰਾ ਤਿਨੇ ਗੁਰਮੁਖ ਹਰਨਾਮ ਤੇ ਆਇਆ ਜਿਸ ਨੂੰ ਕਰਮ ਹੋਵੇ ਜਿਸ ਤੇ ਕਿਰਪਾ ਹੋਏ ਪੂਰੀ ਤੁਰਨ ਦਰਗਾਹਾਂ ਤੇ ਆਇਆ ਜੋਤ ਦਾ ਗਿਆਨ ਹਰ ਕੇ ਹਰਨਾਮ ਦਾ ਮਤਲਬ ਹੈ ਗਿਆਨ ਹੈ ਹਰਨਾਮ ਉਹਦੀ ਮਿਹਰ ਠੀਕ ਹੈ ਆਤਮ ਗਿਆਨ ਹੈ ਆਤਮ ਗਿਆਨ ਵਾਹਿਗੁਰੂ ਵਾਹਿਗੁਰੂ ਨਹੀਂ ਹਰਨਾਮ ਜਿਹੜਾ ਹੈ ਆਤਮ ਗਿਆਨ ਉਹ ਤੇ ਆਇਆ ਹੈ ਜੀ ਉਹ ਤੇ ਆਇਆ ਠੀਕ ਹੈ ਮੈਨੂੰ ਵਾਲੇ ਵਾਲੇ ਲੋੜ ਨਹੀਂ ਉਹਦੀ ਅੱਛਾ ਮਹੱਲਾ ਤੀਜਾ ਸਤਿਗੁਰ ਜਿਨ੍ਹਾਂ ਨਾਲ ਸੇਵਿਓ ਸ਼ਬਦ ਨਾਲ ਲੱਗੋ ਪਿਆਰ ਤਹ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਜਨਾ ਨੇ ਸਤਿਗੁਰ ਦੀ ਗੱਲ ਮੰਦੀ ਸੁਣੀ ਹਾਂ ਹਾਂ ਨਾ ਨਾ ਦਾ ਸ਼ਬਦ ਨਾਲ ਪਿਆਰ ਲੱਗਿਆ ਵੰਦੇਸ ਨਾਲ ਪਿਆਰ ਲੱਗਿਆ ਸਤਗੁਰ ਦਾ ਅੱਖਾਂ ਬੁਧੀਆਂ ਨਹੀਂ ਸ਼ਬਦਾਂ ਦਾ ਪਿਆਰ ਲੱਗਿਆ ਸੀ ਠੀਕ ਹੈ ਜੀ ਜੇ ਅੱਖਾਂ ਬੰਦੇ ਸ਼ਬਦਾਂ ਦਾ ਪਿਆਰ ਲੱਗ ਜਾਂਦਾ ਜੇ ਸ਼ਬਦਾਂ ਦਾ ਪਿਆਰ ਲੱਗ ਜਾਂਦਾ ਮੰਨ ਲੇ ਗੱਲਾਂ ਇੱਕੋ ਚੰਗੀ ਨਹੀਂ ਲੱਗੀ ਸਤਗੁਰ ਦੀ ਗੱਲ ਐ ਕਹਿ ਲੋ ਦਾ ਸੌਦਾ ਲੱਗਿਆ ਉਹਨਾਂ ਨੂੰ ਮੈਨੂੰ ਐ ਉਹ ਵਾਲਾ ਸੌਦਾ ਠੀਕ ਲੱਗਿਆ ਦੂਆ ਢਾਕੇ ਵਾਲਾ ਲੱਗਿਆ ਸੌਦਾ ਨਾਮ ਨਾਲ ਧਿਆਇਆ ਚਿਤ ਸੰਸਾਰ ਕਹੇ ਜੀ ਉਸ ਤਾਂ ਦੇ ਵਿਚਾਨਾ ਨੂੰ ਦਾ ਕਿਆ ਨਹੀਂ ਤੇ ਆਹ ਜੁੜਿਆ ਨਹੀਂ ਹੂੰ ਹੂੰ ਇਹ ਤਾਂ ਸੰਸਾਰ ਸੰਸਾਰ ਦੀ ਕੀ ਗੱਲ ਆਇਆ ਸੀ ਇਹਦੀ ਗੱਲ ਨਹੀਂ ਤੇ ਕੋਲ ਸੰਸਾਰ ਕਿਉਂ ਗੱਲ ਆਇਆ ਸੀ ਕੀ ਗੱਲ ਆਇਆ ਵਿਰੋਧ ਕਰਨਾ ਆਤਾ ਗੁਰਮਤ ਪਿਆ ਜੜਾਂ ਚ ਤੇਲ ਪਾਉਣ ਆਇਆ ਸੀ ਕੁਛ ਨਹੀਂ ਆਉਣਾ ਤੇ ਜੋ ਮਰਜੀ ਕਰ ਸਾਰੇ ਉੜ ਜਾਣਗੇ ਜਿਵੇਂ ਰਹੀ ਆਈ ਤੇ ਸੁੱਕੇ ਪੱਤੇ ਨਾ ਤੇ ਪੁੱਲ ਦੇ ਥੱਲੇ ਪਏ ਡਿੱਗੇ ਸਾਰੇ ਉੜ ਜਾਂਦੇ ਜਿਹਾ ਬੋਲਦੀ ਤੇ ਫਿਰ ਪਾ ਤੋੜਾਂ ਦੇ ਪੜਵੇ ਪੱਤਿਆਂ ਮਾ ਉੜ ਜਾਣਾ ਤੁਸੀਂ ਰਹਿਣਾ ਕਿਸੇ ਨਾਲ ਨਹੀਂ ਠੀਕ ਹੈ ਜੀ ਫਿਰ ਫਿਰ ਜੁਨੀ ਪਾਈਏ ਬਿਸਤਾ ਸਦਾ ਕੁਾਰ ਫਿਰ ਫਿਰ ਜੁਨੀ ਪਾਈਏ ਤੂੰ ਆਪ ਆਪੇ ਸਿੱਖ ਬਣ ਜੀ ਸਿੱਖ ਬਣ ਜਾਂਦਾ ਜੁਦੀ ਕਿਉਂ ਬਣਦਾ ਤੂੰ ਤਾਂ ਲੋਕਾਂ ਨੂੰ ਸਿੱਖ ਬਣਾਉਣਾ ਸਿੱਖ ਤਾਂ ਤੂੰ ਆਪੇ ਦੀ ਹੈ ਸਿੱਖ ਦੀ ਜੁਦੀ ਦੁਆਰਾ ਨਹੀਂ ਹੋ ਸਕਦੀ ਠੀਕ ਹੈ ਤੈਨੂੰ ਜੁਦੀ ਬਣੂਗੀ ਤੇਨੂੰ ਜੁਦੀ ਬਣੂਗੀ ਗਰੰਟੀ ਦੀ ਗੱਲ ਹੈ ਫਿਰ ਫਿਰ ਪਤਾ ਨਹੀਂ ਕਿੱਦੀ ਗਮਾਰ ਬਣੂਗੀ ਫਿਰ ਫਿਰ ਜੁਦੀ ਭੁਆਈਆ ਦੂ ਵਿਸ਼ਟਾ ਜੇ ਭਾਈ ਉਹ ਬਿਸ਼ਟਾ ਹੀ ਆ ਠੀਕ ਹੈ ਪੁਛਤਾਨ ਖੁਆਰੀ ਹੈ ਜਿੰਨ ਜਰ ਬੇਚਾ ਦਾ ਜੀਵਨ ਹੈ ਖੁਆਰੀ ਹੋਈ ਹੈ ਇੱਥੇ ਦੀ ਸਰਦਾਰੀ ਵੀ ਖੁਆਰੀ ਹੈ ਚਾਹੇ ਬਾਦਲੇ ਹੈ ਚਾਹੇ ਰਾਜਾ ਵੀ ਹੈ ਚਾਹੇ ਕੋਈ ਰਾਜਾ ਨਾ ਮਹਾਰਾਜਾ ਵੀ ਹੈ ਵਹਾਲੇ ਦੀ ਖੁਆਰੀ ਹੈ ਜੇ ਰਾਜ ਚਿੱਤਾਂ ਕੀ ਖੁਦੀ ਹੈ ਚਿੱਤਾਂ ਘੰਟੀ ਆ ਰਾਤ ਨੂੰ ਦੇਵਨਿਆਂ ਰਾਜਾ ਰਾਂਗ ਦੇ ਦੋ ਮਿਲ ਰੋਈ ਹੈ ਰੋਂਦੇ ਨੇ फिर फिर ਜੁਨੀ पाई है, ਵਿਸਤਾ सदा ਖਵਾਰ कूड़े ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਕੂੜੇ ਲਾਲ ਜਿਹੜੇ ਲੱਗੇ ਐ ਨਾ ਹਾਂਜੀ ਉਹ ਦਾ ਇਧਰ ਲੈ ਕੰਨੇ ਲੱਗੇ ਨਾ ਉਧਰ ਦੇ ਵਿੱਚੇ ਹੀ ਰਹੇ ਭੱਜਾਦਰ ਦੇ ਨਾ ਉਰਵਾਰ ਨਾ ਪਾਰ ਆਵਾਜ਼ਾਂ ਕਰਦੇ ਇਹਦੇ ਜਲੇ ਜਾਉ ਭਵਸੰਦਰ ਸੁਖਸੰਦਰ ਦੇ ਵਿੱਚ ਹੈ ਅੱਛਾ ਇੱਕ ਪਾਸੇ ਕਦੇ ਕੰਨੇ ਲੱਗ ਜਾ ਸੁਖਾਗ ਰਹੇ ਹੂੰ ਹੂੰ ਠੀਕ ਹੈ ਜੀ ਉਹ ਜਿੱਥੇ ਖੜਾ ਬੋਲ ਰਿਹਾ ਹੈ ਖੜਾ ਬੋਲ ਰਿਹਾ ਜਿਹੜਾ ਬੰਦਾ ਬਾਲੀ ਗੱਜ ਉਹ ਔਰ ਆਪਣੀ ਗੱਲ ਨੂੰ ਕਹਿ ਰਿਹਾ ਜਿੱਥੇ ਉਹ ਖੜਾ ਹੈ ਜਿੱਥੇ ਗੰਗਾ ਜਾ ਕੇ ਭਲੀ ਹੈ ਸਬੂਦ ਦੇਣ ਦਾ ਜਿੱਥੇ ਨਾਨਕ ਨੇ ਘਰ ਵੱਧਾ ਰਾਗਮੱਦਾ ਕਰਤਾ ਹਾਂ ਜਾਂ ਉੱਥੇ ਜਾ ਕੇ ਉੱਥੇ ਉੱਥੇ ਗਏ। ਨਾ ਉਦੋਂ ਜਾ ਕੇ ਲੱਗੇ ਤੇ ਲੱਗਦਾ ਜਾਂਦੇ ਪਰੇ ਕਿਨਾਰੇ ਲੱਗ ਜਾਂਦੇ ਜਾ ਕੇ। ਸਾਜ ਖਾਨਾ ਦਾ ਜੁੜ ਜਾਂਦੇ ਕਿਦੇ ਨਹੀਂ ਜੁੜ ਫੇਰ ਪਾ ਜੁੜ ਜਾਂਦੇ। ਆਵਜ਼ਾਦਰ ਨੂੰ ਪਾਰ ਕਰਕੇ ਕਿਵੇਂ ਜੁੜ ਜੁੜਨ ਦਾ ਸਹੀ। ਸਾ ਉੱਧਰ ਦੇ ਰਹੇ ਨਾ ਉੱਧਰ ਦੇ ਰਹੇ। ਠੀਕ ਹੈ ਜੀ ਜਿਵੇਂ ਆਪਾਂ ਕਹਿਆ ਤਾਂ ਦੋ ਵੀਰਾ ਕੋਤਾਂ ਨਾ ਕਰ ਕੂੜੇ ਲਾਲਚ ਲੱਗੇ ਆ ਨਾ ਗੁਰਮੁਖੀ ਉਭਰੇ ਜੇ ਆਪ ਮੇਲੇ ਕਰਤਾਰ ਨਾਨਕ ਗੁਰਮੁਖ ਉਭਰੇ ਬਰਮੁਖ ਉਰੇ ਨੇ ਹੋਵੇ ਉਭਰੇ ਇਹਦੇ ਆਈ ਆ ਘਾੜਲ ਵਾਰ ਆ ਗਿਆ ਪਾਣੀ ਤੋਂ ਘਾਲ ਦੇਖਣ ਲੱਗਿਆ ਵੀ ਕੁਝ ਹੈ ਬਾਹਰ ਦੁਰੀਆਂ ਹਾਰੇ ਗੁਰਮੁਖ ਉਪਰੇ ਜੇ ਆਪ ਮੇਲੇ ਕਰਤਾਰ ਜੇ ਕਰਤਾਰ ਆਪ ਬੇਲਵੇ ਤੇ ਗੁਰਮੁਖ ਬਿਰਣੂ ਤਿਆਰ ਤਾਂ ਹੋ ਗਏ ਇੱਛਾ ਤਾਂ ਪ੍ਰਗਟ ਹੋ ਗਈ ਗੁਰਮੁਖਾਂ ਦੇ ਮਿਲਣ ਤੇ ਡਿਪੈਂਡ ਕਰਦਾ ਉਹ ਬੁਲਾਉਂਦਾ ਕਿ ਨਹੀਂ ਬੁਲਾਉਂਦਾ ਉਹਦੀ ਹੁਣੀ ਵਿਚ ਤੇ ਗੁਰਮੁਖ ਬਿਰਣੂ ਤਿਆਰ ਖੜੇ ਨੇ ਹੁਣ ਕਿਰਪਾ ਦੀ ਲੋੜ ਹੈ ਤੋ ਤਿਆਰ ਖੜੇ ਵੀ ਤੇ ਇਹ ਫਿਰ ਦੋ ਪਦਾਰਥ ਲੈ ਲਏ ਇਹਨਾਂ ਨੇ ਹਾਂਜੀ दो दोवर दा ले जो रह गए ठीक पौड़ी भगत सच्चे दरसों दे सच्चे शब्द रहाए हरकी प्रीत तिन उपजी हर प्रेम कसाई सच्चे, सच्चे शब्द नाल जुड़े रहने ने हो ता करके सोने हो सच्चे शब्द नाल नाम ना जुड़े साथ शब्द नाम ਨਾ ਗੁਰਬਾਣੀ ਵੀ ਸੱਚਾ ਸਭ ਸ਼ਬਦ ਹੀ ਹੈ ਹਰ ਕੀ ਪ੍ਰੀਤ ਇਹਨੂੰ ਉਪਜੀ ਉਹਦੇ ਅੰਦਰ ਹਰ ਕੀ ਪ੍ਰੀਤ ਦਾ ਹੋ ਗਈ ਹਰ ਦੇ ਪ੍ਰੇਮ ਦਾ ਖਿੱਚ ਪੈ ਗਈ ਉਹਨਾਂ ਦੇ ਅੰਦਰ ਫਸ ਪੈ ਗਈ ਹਾਂ ਜਿਹਾ ਜਾਣ ਖਿੱਚ ਪੈ ਠੀਕ ਹੈ ਹਰ ਰੰਗ ਰਹੇ ਸਦਾ ਰੰਗ ਰੱਬ ਦੇ ਨੇ ਹਰ ਵੇਲੇ ਰਸਨਾ ਹਰ ਰਸ ਪਿਆਏ ਆਪਣੀ ਰਸਨਾ ਨਾਲ ਆਪਣੀ ਆਵਾਜ਼ ਨਾਲ ਆਪਣੀ ਬੋਲ ਕੇ ਆਪਣੀ ਬੋਲੀ ਨਾਲ ਲੋਕਾਂ ਨੂੰ ਹਰ ਰਸ ਪਲਾਉਂਦੇ ਨੇ ਦੂਜਿਆਂ ਨੂੰ ਖਾਂਦਾ ਸਵੰਦੇ ਨੇ ਆ ਵੀ ਆਸ ਨੇ ਠੀਕ ਹੈ ਜੀ ਹਰ ਰਸਨਾ ਹਰ ਰਸ ਪਿਆਏ ਠੀਕ ਹੈ ਜੀ ਰਸਨਾ ਬੁੱਧੀ ਹੋਊਗੀ ਜੀ ਇੱਥੇ ਕੋਣ ਠੀਕ ਹੈ ਜੀ ਸਫਲ ਆਪਣੀ ਬਾਣੀ ਨਾਲ ਠੀਕ ਹੈ ਜੀ ਬੋਲਦੇ ਜੀ ਵਿਚਾਰਦੇ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜਿਉ ਰਿਧੈ ਵਸਾਏ ਬਾਜੋਂ ਗੁਰੂ ਫਿਰੇ ਬਿ ਲਾਂਦੀ ਦੂਜੇ ਭਾਇ ਖੁਆਈ ਉਹ ਜਿਹਨੇ ਗੁਰਮਖ ਜਾਣ ਲਿਆ ਸਫਲ ਜਨਮ ਤਾਂ ਉਹਦਾ ਹੀ ਹੋ ਸਫਲ ਜਨਮ ਉਹਦਾ ਹੋ ਗਿਆ ਜਿਹਨੇ ਗੁਰਮੁਖ ਨੂੰ ਪਛਾਨ ਲਿਆ ਗੁਰਮੁਖ ਨੂੰ ਪਛਾਣਨਾ ਬੜਾ ਔਖਾ ਕਾਲੋ ਨੂੰ ساری ਜ਼ਿੰਦਗੀ ਨਹੀਂ ਪਤਾ ਲੱਗਿਆ ਮੇਰਾ ਮੁੱਢਾ ਗੁਰਮੁਖਾ ਇਹ ਨੜਵਾਇ ਨਹੀਂ ਹੁੰਦਾ ਪਤਾ ਠੀਕ ਹੈ ਜੀ ਸ੍ਰੀ ਚੰਦ ਨੂੰ ਨਹੀਂ ਪਤਾ ਲੱਗਿਆ ਇਹ ਤਾਂ ਦੇਖਾ ਰਹੇ ਦਾ ਹਾਂ ਇਹ ਗੁਰਮੁਖ ਦਾ ਜਾਤਾ ਹਾਂਜੀ ਹਰ ਜੀ ਉਹ ਰਿਦੇ ਵਸਾਈ ਬਸ ਉਹ ਹਰ ਜੀ ਉਹ ਰਿਦੇ ਚ ਵਸਾ ਲੈਂਦਾ ਉਹ ਵੀ ਜਦੋਂ ਗੁਰਮੁਖ ਦੀ ਪਛਾਣ ਆ ਗਈ ਗੁਰਮੁਖ ਦੀ ਪਛਾਣ ਉਹ ਕਿੰਨੀ ਛੋਟੀ ਬੂਢੀ ਗੱਲ ਨਹੀਂ ਹੈ ਛੋਟੀ ਬੂਢੀ ਗੱਲ ਨਹੀਂ ਉਹ ਜੇ ਜਾਣਿਆ ਸੋ ਤੁਸੀਂ ਜਿਹਾ ਠੀਕ ਹੈ ਜੀ ਜੇ ਗੁਰੂ ਘਰ ਨੂੰ ਜਾਣ ਲੈ ਅਸਲ ਜੋ ਗੁਰਮਖੇ ਹੁੰਦਾ ਸਭ ਗਿਆਨੀ ਕੀ ਗੱਤ ਪਰਮ ਗਿਆਨੀ ਜਾਣੇ ਉਹ ਉਹ ਬੰਦਾ ਹੁੰਦਾ ਹੈ ਗਿਆਨਤਾ ਕਰਕੇ ਕੋਈ ਮੈਂ ਤਾਂ ਸੁਣਦਾ ਹੈ ਬੋਲਦਾ ਤੇ ਘਟਿਆ ਆ ਪਰਮ ਹੁੰਦਾ ਉਹ ਰੂਹ ਇਹ ਪਰਮ ਘਟਿਆ ਠੀਕ ਹੈ ਜਿਨ ਕਰਤਾ ਸੋ ਤੁਸੀਂ ਜਿਹਾ ਹਰ ਜੀ ਜਿਹਦੇ ਵਿਸਾਏ ਹੱਦੀ ਉਹ ਵੀ ਵਸਾ ਲੈਂਦਾ ਬਾਜੂ ਗੁਰੂ ਫਰੇਬੇ ਲਾਂਦੀ ਦੂਜੇ ਪਾਏ ਖਵਾਈ ਗਿਆਨ ਤੋਂ ਬਿਨਾ ਬਾਜ ਗੁਰੂ ਫਰੇਬੇ ਲਾਂਦੀ ਬਾਜੂ ਆ ਹੈ ਕੂਚੇ ਪਾਏ ਖਵਾਈ ਕੋਦੇ ਅੰਦਰ ਬਾਹਰੀ ਜੰਗਲ ਦੀ ਬੜੀ ਬੇਰਤੋੜ ਖੋਗੀ ਜੰਗਲ ਲੱਭਦਾ ਹੀ ਨਹੀਂ ਠੀਕ ਹੈ ਜੀ ਉਨੇ ਦਸਤਾ ਲੱਭਦਾ ਹੂੰ ਹੂੰ ਇੱਥੇ ਫਿਰ ਗੁਰੂ ਅੱਖਰ ਕੀ ਵਰਤਿਆ ਜੀ ਗੁਰ ਕਾਹਦੇ ਨੀ ਵਰਤਿਆ ਗਿਆਨ ਗੁਰੂ ਗਿਆਨ ਗੁਰੂ ਵਸੇ ਅੱਛਾ ਜੀ